Hikayat tisri ik onkar wahguru ji ki fatah khuda wand danish deho dad kar raza baksh rozi deho har hunar hama baksh bakshend o dastgir khushais kuno rehnumais bazir hikayat suni dam yakay nek mard ke azdhor dushman ਜੇ ਰਜ਼ਮੋ ਬਾਬਾ ਜ਼ਮੋ ਹਮਾ ਬੰਦ ਵਸਤ ਕੇ ਬਿਸ਼ਿਆਰ ਤੇਗਸਤ ਹੁਸ਼ਿਆਰ ਦਸਤ ਨਿਵਾਲਾ ਪਿਆ ਲਾਜ਼ੇ ਰਜ਼ਮੋ ਬਾਬਾ ਜ਼ਮੋ ਤੋ ਗੁਫਤੀ ਕੇ ਦੀਗਰ ਜਲੇ ਸ਼ੁਦ ਬਾਬਾ ਜ਼ਮੋ ਜੇ ਥੀਰੋ ਤੋ ਹੰਗ ਹਮਚੋ ਆ ਮੁਖਤਾ ਸ਼ੁਦ ਤੋ ਗੋਈ ਕੇ ਦਰਸ਼ਕੰ ਅੰਦੋਖਤਾ ਸ਼ੁਦ ਚੋ ਮਾਲਿਸ਼ ਗੇ ਰਾਨਸ਼ ਅਜ਼ੀਮ ਕੇ ਮੁਲਕਿਸ਼ ਬਸੇ ਅਸਤ ਬਖਸ਼ਿਸ਼ ਕਰੀ ਅਦੋ ਬਾਦਸ਼ਾਹੀ ਬਾ ਆਖਰ ਸ਼ੁਦ ਅਸਤ ਨਿਸ਼ਸਤੰਦ ਵਜ਼ੀਰਾਨ ਉ ਪੇਸ਼ ਪਸਤ ਜੇ ਤੋ ਪਾਸ ਕੇ ਰਾਬਾਦ ਸ਼ਾਹੀ ਤੇ ਹਮ ਕਿਰਾਤਾਦ ਇਕਵਾਲ ਪਰ ਸਰ ਨਿਹਮ ਕਿਰਾਵਰ ਦੇ ਅਦ ਖਾਨਾ ਬੇ ਰੂਪੁ ਨਦ ਕਿਰਾ ਬਖਤੀ ਇਕਵਾਲ ਪਰ ਸਰ ਨਿਹਦ ਬਹੋਸ਼ ਅੰਦਰ ਆਮਦ ਕੁਸ਼ਾ ਦੋ ਦ ਚਸ਼ਮ ਬਗੁਫਤਾ ਸੁਖਣ ਸਾਹਿ ਪੇਸ਼ੀਨ ਰਸਮ ਨਾ ਪਾਉ ਨਾ ਦਸਤੋ ਨਾ ਚਸ਼ਮੋ ਜ਼ੁਬਾਨ ਨਾ ਹੋਸ਼ੋ ਨ ਹਿੰਮਤ ਨਾ ਹੈ ਬਤ ਨਾ ਹੌਲੋ ਨਾ ਹਿੰਮਤ ਨਾ ਹਿਲਾ ਨਾ ਹੋਸ਼ ਨਾ ਬੀਨੀ ਨਬੀ ਨਾਏਗੀ ਹਰ ਦਗੋਸ਼ ਹਰਾ ਕਸ ਕੇ ਹਸਤਾ ਅਜ ਮਾਇਸ਼ ਬਵਦ ਵਜ਼ਾਂ ਦੌਰ ਦੀ ਬਾਦਸ਼ਾਹ ਹਸ ਬਵਦ ਅਜਬ ਮਾਦ ਧਾਰਾਏ ਦੌਰ ਈ ਜਵਾਬ ਸੁਖਨ ਬਾਦ ਦੀਗਰ ਕੁਨਦ ਬਾਸਵਾ ਰੰਗਸ਼ ਗ੍ਰਫਤ ਜ਼ੁਬਾਨੇ ਸੁਖਾਂ ਦਾਬ ਰੰਗਸ਼ ਗ੍ਰਫਤ ਜਪੋ ਰਾਸ ਤਜ ਕਰਤ ਚਰਖੇ ਜੁਵਾ ਬਰਾਵਰਦ ਸੁਖਨੇ ਨੇ ਤੋ ਕਹਿ ਵਰ ਕਮਾਂ ਕਿ ਇਹ ਸਾਹੇ ਆਜ਼ਾਦ ਮਗਜ਼ ਚਿਰਾ ਮੇ ਤੋ ਗੋਈ ਦਰੀ ਕਾਰ ਨਗਦ ਕਸੇ ਰਾਸ਼ ਵਦਕਾਰ ਹਸਤ ਐ ਬਸਤ ਦਾ ਹਰ ਜਹਾਂ ਕਿ ਈ ਹਸਤ ਐ ਬੋਤ ਗੋਈ ਹੁਨਰ ਕੇ ਇਹ ਸਾਹ ਸਾਹਾਨ ਹਵਾ ਬਾਰ ਬਾਰ ਨਾ ਦਰ ਜੰਗ ਪੁਸ਼ਤੋ ਨਾ ਦੁਸ਼ਨਾਮ ਦਾਦ ਨਾ ਅੰਗੁਸ਼ਤ ਬਰ ਹਰਫ ਦੁਸ਼ਮਣ ਨਿਹਾਰ ਨਾ ਆਰਾਮ ਦੁਸ਼ਮਣ ਨਾ ਆਧਾਰ ਦੋਸਤ ਜਵਾ ਬੇਗਦਾਰਾ ਅਧੂਰਾ ਬਪੋਸਤ ਨਾ ਵੀ ਸਿੰਧਾਰਾ ਜਾ ਨਾ ਹਰਫੂ ਨਿਹਦ ਸੁਖਣ ਰਬ ਜਾਏ ਸਰਪੋ ਦਿਹਾਦੇ ਨਾ ਉਸਤਾਦ ਰਾਦ ਆਦ ਜਾਏ ਨਾ ਦਾਦਨ ਵਿਹਸ ਨਾਮ ਓ ਚੂਦ ਗੋਇਦ ਹੋ ਨਰ ਨਬੀ ਨ ਦਿਗਰ ਖੁਦਾਸ਼ ਨਾ ਬਦਕਾਰ ਕਸ ਕਰਤ ਨਜ਼ਰ ਕਰਦ ਕਸ ਨਾ ਹਰ ਫੇ ਹਰਾਮ ਨਿਗਾਹ ਦਾਸਤ ਪਰ ਸ਼ੁਕਰੀ ਅਜ ਦਾਮੁਦਾਮ ਨਜ਼ਰ ਰਬ ਬਧਕਾਰ ਦੀ ਗਿਰ ਬਾਸਤੇ ਸ਼ਨਾਸੀ ਤੋਂ ਤਾ ਹਕੀਕ ਉਹ ਕੋਰ ਹਸਤ ਕਦਨ ਰਾ ਨਦਾਰਤ ਬਧਕਾਰ ਕਾਰ ਨਾ ਦਰ ਜੰਗ ਪਸ ਭਾਉ ਪੁਸ਼ਤੇ ਬਰਾਰ ਨਾ ਧਰਕਾਰ ਦੁਸਤੀ ਨਾ ਦਿਲ ਬਿਸ਼ਕਣੀ ਨਾ ਖਾਣਾ ਖੁਰਮ ਬਾਦ ਨਹ ਰਾਜ਼ਨੀ ਬਨਾ ਕਸ ਦੁਆਏ ਨਾ ਕੋ ਸੁਖਨ ਵਖਾਸ਼ ਕਾਸ਼ੀ ਨਾ ਜੋਈ ਸੁਖਨ ਬਾ ਬਦਕਾਰ ਕਸ ਦਰਨ ਦਾ ਦੰਦ ਪਾਏ ਕਿ ਉਹ ਪਾਏ ਲੰਗ ਅਸਤ ਕੋਈ ਮਤਾਰਾ ਨਾ ਆਲੂ ਦਾ ਦਸਤ ਵਖੁਰਸ਼ੇ ਹਰਾ ਮੋ ਕੁਸ਼ਾਇਦ ਨ ਦਸਤ ਵਖੁਦ ਦਸਤ ਖਾ ਨਾ ਗੀਰੰਤ ਮਾਰ ਆਜ ਜਾਣ ਨਾ ਖੁਦ ਅਸਤ ਅੰਦਾਖ ਤਨ ਰૈયਤ ਖੁਲਾਸਾ ਨ ਬਰਤਾਖ ਤਨ ਬਖੁਦ ਰਿਸ਼ਵਤ ਨਾ ਆਲੂ ਦਾ ਕਰਦੇ ਕਿ ਅਦ ਸ਼ਾਹੇ ਦੁਸ਼ਮਨ ਬਰਾਬੁਰਦ ਕਰਦੇ ਨਾ ਜਾਏ ਅਧੂਰਾ ਦੇ ਹੱਦ ਵਕਤ ਜੰਗ ਬਿਵਾਰਿਸ਼ ਦੇ ਹੱਦ ਤੇਗ ਤਰ ਕਸ਼ਕਤੰਗ ਨਾ ਆਰਾਮ ਦੇ ਹੱਦ ਅਸਪਰਾ ਵਕਤ ਕਾਰ ਨਾ ਜਾਏ ਸ਼ ਅਧੂਰਾ ਦੇ ਹੱਦ ਦਰਦ ਯਾਰ ਕਿ ਬੇਦਸਤ ਉਹ ਹਸਤ ਕੋਪੁਰ ਨਰ ਬਾਲੂਦਗੀ ਦਰ ਨ ਬਸਤਨ ਕ ਮਰਮ ਨ ਗੋਇਦ ਕਸੇ ਬਾਸੁਖਨ ਜੀ ਜ਼ੁਬਾਨ ਕੇ ਉਹ ਬੇਜਵਾਨ ਹਸਤ ਜਾਹਰ ਜਹਾਨ ਸੁਨੀਦਨ ਨ ਬਾਸੁਖਨ ਕਸਰਾ ਬਗੋਸ਼ ਕੇ ਉਹ ਹਸਤ ਬੇਗੋਸ਼ ਕੋਈ ਬਾਉਸ਼ ਕੇ ਪਾਸ ਪਰਦਾ ਚੁਗਲੇ ਸ਼ਨੀ ਦਨ ਨਾ ਕਸ ਵਿਦਾਂ ਖੁਸ਼ ਰਾਸੀ ਕੇ ਕੋਈ ਸ਼ਹਾਸ ਕਸੀਕਾਰ ਬਦਰਾ ਨਾ ਗੀਰੰਦ ਬੋਏ ਕੇ ਉਹ ਹਸਤ ਬੇਬੀ ਨੇ ਉਹ ਨੇਕ ਹੋਏ ਨਾ ਹੌ ਲੋ ਦਿਗਰ ਹਸਤ ਸੁਵਾ ਖੁਦਾਏ ਕੇ ਹਿੰਮਤ ਵਰਾਂ ਦਾ ਦਰਾਰ ਦੁਜੇ ਪਾਏ ਬਹੁਸ਼ ਅੰਦਰ ਆਮਦ ਹਮਾ ਵਕਤ ਜਾਗੇ ਕੇ ਕੋਸ਼ਿਸ਼ ਕੋ ਪਾਏ ਬਾਤੀ ਰੋਤ ਫੰਗ ਕੇ ਦਰਕਾਰ ਇਨਸਾਫ ਉਹ ਹਿੰਮਤ ਅਸਤ ਕੇ ਦਰ ਪੇਸ਼ ਗਰਬਾਏ ਉਹ ਆਜ ਜੇ ਅਸਤ ਨਹੀ ਲਹਕੁਨਦ ਵਕਤ ਦਰਕਾਰਦਾਰ ਨਾ ਹੈ ਬਤ ਕੁਨਦ ਦੁਸ਼ਮਨਾ ਪੇਸ਼ਵਾਰ ਹਰਾ ਕਸ ਕੇ ਜੀ ਹਸਤ ਗਾਦੀ ਬਵਦ ਵਕਾਰੇ ਜਹਾਂ ਅਰਜ਼ਮ ਸਾਜੀ ਕੁਨਦ ਕਸੀ ਰਾਂ ਕੇ ਈ ਕਾਰ ਆਇਦ ਪਸੰਦ ਵਦਾਂ ਸ਼ਾਹ ਬਾਸ਼ਿਸ਼ ਜਹਾਂ ਅਰਜ਼ਮੰਦ ਸੁਨੀ ਦੀ ਸੁਖਨ ਤੌਰ ਦਾ ਨਾ ਵਜ਼ੀਰ ਕੀ ਆਕਲਿ ਸ਼ਨਾਸ ਅਸਤ ਪੋਜਿਸ਼ ਪਜ਼ੀਰ ਕਥੇ ਸਨਾਦ ਸੁਭਾ ਅਕਲੇ ਬਹੀ ਮਰੋ ਰਾਬ ਦੇਹ ਤਾਜ ਤਖਤੋ ਮਹੀ ਬ ਦੋ ਰਾਮਹੀ ਤਖਤ ਤਾਜ ਗਰ ਓ ਰਾਸ਼ਨਾਸੀ ਰਈਤ ਨਿਵਾਜ਼ ਬਹੈਰਤ ਦਰ ਆਮਦ ਵਾਪਿਸ ਰਾਂ ਚ ਹਾਰ ਕਸ ਕੇ ਰਾ ਅਕਲ ਯਾਰੀ ਦੇ ਹੱਦ ਬਕਾਰੇ ਜਹਾਂ ਕਾਮਗਾਰੀ ਕੁਨਦ ਵਿਦੇਸ ਆ ਕੀ ਆਸਾ ਗਰੇ ਰੰਗ ਕੇ ਮਾਰਾ ਬਕਾਰ ਅਸਤ ਦਰਬਖਤ ਜੰਗ ਵਿਦੇਸ ਆ ਕੀ ਆਸਾ ਪਾਨ ਕੁਨਾਦ ਪੀਰ ਸਾਦਸਾ ਲਾਰਾ ਨੌਜਵਾਨ ਹਕਾਇਤ ਚੌਥੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਹ ਕੇ ਰੋਜੀ ਦੇਹਾਂ ਦਸਤ ਰਾਜ ਕਰੀਮ ਰਹਾਏ ਦਿਹੋ ਰਹਿ ਰੁਮਾਏ ਕਰੀਮ ਦਿਲ ਅਫਜ਼ਾਏ ਦਾਨਿਸ਼ ਦਿਹੋ ਦਾਤ ਕਰ ਰਜ਼ਾ ਬਖਸ਼ ਰੋਜੀ ਦਿਓ ਹਰ ਹੁਨਰ हे कायत सुनी यके नेक जन जो शमशाद कदे बदोए चमन के ओरा पदर राध हे उत्तर देश वासी री हम से इखलास केश के आमद बराए हम आ गुसल गंग चो कैवर कवा हम जो तीरे तुफंग हमी खास के ओरा स्वंबर कुनम कसे ही पसंद आएद ओरा ਬਿਗੁਏ ਸੁਖਨ ਦੁਖ ਤਰੇ ਨੇਕ ਤਨ ਕਸੇ ਤੋ ਪਸੰਦ ਆਇਦੂ ਰਾਬਕੁਨ ਨਿਸ਼ਾਦੰਦ ਵਰਕਾਖ ਉਹ ਹfst ਖਨ ਚੋ ਮਾਹੇ ਮਹੀ ਆਪਤਾ ਬੇ ਜ਼ਮਨ ਦਹਾਨੇ ਦੁ ਹਜ਼ਰਾ ਦਹਾਨ ਬਰਕੁਸ਼ਾ ਜਵਾਬੇ ਸੁਖਨ ਰਾਹੂ ਬਰ ਨਿਹਾਦ ਕਿ ਇਂ ਰਾਜ ਹੈ ਰਾਜ ਖਾਵੇ ਸ਼ਮਾਰ ਕਿ ਵਕਤੇ ਤਰੱਦਦ ਬਿਆ ਮੁਖਤਾਕਾਰ ਕਸੇ ਤੋ ਪਸੰਦ ਆਇ ਦਤ ਇਂ ਪਸ ਬਦਾ ਮਾਦੀ ਨੁਮਾਦਾਂ ਬਾਉ ਰਾਜ ਹਾਂ ਬੇਸ਼ੁਮਾਰ ਪਸੰਦਸ਼ ਨੇ ਆਮਦ ਕਥੀ ਕਾਰਵਾਰ ਹਮ ਆਖਰੀ ਜਕੇ ਰਾਜ ਹੈ ਸੁਖਟ ਸਿੰਘ ਗੁਰ ਰਾਨਹੰਗ ਹਮਾਂ ਉੰਦ ਹੈ ਰਾਜ ਹਾ ਪੇਸ਼ ਖਾਨ ਜੁਦਾ ਬਾਰ ਜੁਦਾ ਦੌਰ ਮਜਲਿਸ ਨਿਸ਼ਾਨ ਬਾ ਕੇ ਇਹ ਦੁਖਤ ਰੇ ਨੇਕ ਕੋਏ ਤੋ ਕਸ ਪਸੰਦ ਆਇਦ ਅਜੀ ਹਾਂ ਬਜੋਏ ਰਵਾ ਕਰਦ ਜਨਾਰ ਦਾਰਾਨ ਪੇਸ਼ ਵਿਗੋਇਦ ਕੇ ਹੀ ਰਾਜ ਹੈ ਉੱਤਰ ਕੇ ਉਹ ਨਾਮ ਬਸਤਿ ਪਛਤਰਾ ਚੋ ਮਾਹੇ ਫਲ ਕੇ ਆਫਤਾ ਬੇਵਹੀ ਅਜ਼ੀਰਾਲ ਹਾਂ ਕਸ ਨਿਆਮਨ ਨਜ਼ਰ ਵਜਾਂ ਪਸ ਪੁਰ ਕੋ ਨਜ਼ਰ ਕਰਦ ਬਰ ਰਾਜ਼ ਹਾਂ ਆਦਨੀ ਕਸੇ ਦਿਲ ਨਗੀ ਸਵੰਬਰ ਬਰਾਂ ਰੋਦ ਗਸ਼ਤ ਕੇ ਨਾਜ਼ਮ ਬਰਖਾਸ ਦਰਵਾਜ਼ਾ ਬਸਤਿ ਕਿ ਰੋਜ਼ ਇਹ ਬਰ ਔਰੰਗ ਬਰਾਮਦ ਚੋ ਰੋਸ਼ਨ ਕੋ ਦੇ ਘਰ ਰੋਜ ਹੈ ਰਾਧਾ ਖਾਸ ਤੰਦ ਦੇ ਘਰ ਗੂਨ ਹਬਾਜ਼ਾਰ ਆਰਾਸ ਤੰਦ ਨਜ਼ਰ ਕੋਰ ਬਰ ਹੋਏ ਤੋ ਇਹ ਦਿਲ ਰੁਵਾਏ ਕਿ ਤੋ ਨਜ਼ਰ ਦਰਬੇ ਆਇਦ ਬਜਾਏ ਬਹ ਪਹਿਨੰਦਰ ਆਮਦ ਗੁਲੇ ਅੰਸ ਮਨ ਕਿ ਆਵ ਰੰਗ ਅਸਤ ਸੀਮਾ ਬਨ ਗਸ਼ਤ ਦਰ ਰਾਧਾ ਬੇਸ਼ੁਮਾਰ ਗੁਲੇ ਸੁਰਖ ਚੂ ਗੁੰਬਜੇ ਨੋ ਵਾਰ ਬਦ ਉਸਦੀਦ ਦਿਲ ਰਾਧਾ ਬੇਸ਼ੁਮਾਰ ਬੇਅਫਤ ਜ਼ਮੀ ਚੂ ਜਲੇ ਕਾਰਦਾਰ ਬਿਜੜ ਬਾਗ ਭਰਵੈ ਕਿ ਖਾ ਖੇਸ਼ ਕੇ ਉਮਦ ਹੈ ਰਾਜ ਹਾ ਉੱਤਰ ਦੇਸ਼ ਵਧਾ ਦੁਖ ਤਰ ਹਸਤੀ ਬਛਤਰਾਵਤੀ ਚੋ ਮਾਹੇ ਫਲਕ ਹਮ ਚੋ ਹੂਰੋ ਭਰੀ ਸਵਯੰਬਰ ਦਾ ਰਾਮ ਚੋ ਫਲਕ ਰਿਸ਼ਤਾ ਸਿਵ ਤੋ ਜੋ ਜ਼ਾਦਸ਼ ਮਲਕ ਕੇ ਈ ਮਹਾਰੋ ਕਾਮਗਾਰੀ ਦਿਹਦ ਪਸੰਦ ਆਮਦ ਹੋ ਰਾਜਾ ਸੁਭਟ ਸਿੰਘ ਨਾਮ ਕੇ ਰੋਸ਼ਨ ਤਬੀਅਤ ਸਲੀਖਤ ਮੁਦਾਮ ਰਵਾਕਰਦ ਕਰਦ ਵਕੀਲਸ ਕੇ ਆ ਕੇ ਇਹ ਸ਼ਾਹ ਸ਼ਾਹਾਨ ਰੋਸ਼ਨ ਸਮਾਂ ਕਿਹੀ ਤਰਜ਼ ਲਾਲਾਏ ਵਰਗੇ ਸਮਨ ਕਿ ਲਾਇਕ ਅਸਤ ਈਰਾ ਬਿਗੋਏ ਜਕੇ ਖਾਨਾ ਬਾਨੂ ਮਰਾਸ ਕੇ ਚਸ਼ਮੇ ਅਦੋ ਹਰ ਦੁਆ ਹੂਤਰਾਸਤ ਕਿ ਹਰਗੇ ਮਨ ਹੀਰਾ ਨਾ ਕਰਦਮ ਕਬੂਲ ਕੇ ਕਉਲੇ ਕੁਰਾਂ ਅਸਤ ਕਸਮੇ ਰਸੂ ਬਾਗੋਸ਼ ਅੰਦਰ ਆਮਦ ਅਜ਼ੀਨਾ ਸੁਫਨ ਬਜੁਮ ਬੁਸ਼ਤਰਾ ਆਮਦ ਜ਼ਨੇ ਨੇਕ ਤਨ ਕਸੇ ਫਤਿਹ ਮਾਰਾ ਕੁਨਦ ਵਕਤਕਾਰ ਵਦਾਂ ਸ਼ਾਹੇ ਮਹਾਰਾਜ ਸ਼ਵਾਦੀਂ ਦਿਯਾਰ ਬਖੋਸ਼ੀਦ ਮੈਦਾਨ ਜੋਸ਼ੀਦ ਜੰਗ ਬਖੋਸ਼ੀਦ ਕਫਤਾਨ ਪੋਲਾਦ ਰੰਗ ਨਿਸ਼ਸਤਾ ਪਰ ਆਹ ਰਾਤ ਜੋ ਵਾਹੇ ਮੁਨੀਰ ਬੋ ਬਸਤੰਦ ਸ਼ਮਸ਼ੀਰ ਜੋ ਸਤੰਦ ਤੀਰ ਮਾ ਮੈਦਾਨ ਦਰਿਆਵਤ ਜੋ ਗੁਰ ਰੀਦ ਸ਼ੇਰ ਚੁਸ਼ੇ ਸ਼ੇਰ ਆਪਨੋ ਦਿਲ ਦਲੇਰ ਬਾ ਕੋ ਸ਼ੀਦ ਖੁਫਤਾਨ ਜੋ ਸ਼ੀਦ ਜੰਗ ਬਾ ਕੋ ਸ਼ੀਦ ਮੈਦਾਨ ਤੀਰੋ ਤੂਫੰਗ ਚੁਨਾ ਤੀਰ ਬਾਰਾ ਕੁਨਦਕਾਰ ਜ਼ਾਰ ਕੇ ਲਸ਼ਕਰ ਬਕਾ ਰਾਮਦਸ਼ ਬੇਸ਼ੁਮਾਰ ਚੁਨਾ ਬਾਨ ਭਾਰੀਦ ਤੀਰੋ ਤੂਫੰਗ ਵਸੋ ਵਰਦਮਾ ਮੁਰਧਾ ਸ਼ੁਧ ਜਾਏ ਜੰਗ ਸਾਹੀ ਨਾਮ ਗੱਜ ਸਿੰਘ ਦਾ ਚੁਕੈ ਵਰ ਕਮਾਹਮ ਚੌਥੀ ਰੋ ਤੂਫੰਗ ਮ ਜੁੰਬਸ਼ਤ ਰਾਮ ਚੋ ਆਫਰੀਤ ਮਸਤੇ ਯਕੇ ਗੁਰ ਦੇ ਅਫੀਲ ਪੈ ਕਰਬਾ ਦਾਸਤੇ ਯਕੇ ਤੀਰ ਜਦ ਬਾਣੂ ਏ پاک ਮਰਦ ਕੇ ਗaj ਸਿੰਘ ਆਦ ਅਸਵ ਆਮਦ ਬਾ ਕਰਦ ਜਗਰ ਰਾਜ ਹਰਨ ਸਿੰਘ ਦਾ ਰਾਮਦ ਬਾਰੋਸ਼ ਕੇ ਪਰਵਾਨ ਜਕੇ ਸ਼ਹਿਰ ਅੰਬੇਰ ਦੇ ਘਰ ਜੋਧਪੁਰ ਖਰਾਮੀ ਧਵਾਨੋ ਚੁਰਖ ਸਿੰਘ ਦਾ ਆਮਦ ਦਲੇਰ ਚੋ ਬਰ ਬੱਚਾ ਆਹੂ ਚੋ ਗੁਰ ਰੀਤ ਸ਼ੇਰ ਚੁਨਾ ਤੀਰ ਜਦ ਹਰ ਦੋ ਅਵਰੂ ਸਿਕਾਂਜੇ ਬੇ ਅਫਤਾਦ ਅਮਰ ਸਿੰਘ ਚੋ ਸ਼ਾਖੇ ਤੁਰੰਜ ਝੋਮ ਰਾਜ ਜੈ ਸਿੰਘ ਤੇ ਆਮਦ ਮੁਸਾਹ ਬਜੋਸ਼ ਅੰਦਰੀ ਸੁਚੋ ਅਦ ਕੋਹ ਉਮਾਖੁਰ ਤੇ ਸਰਵਦ ਕੇ ਯਾਰੇ ਚੁ ਅਮ ਜੈ ਸਿੰਘ ਪਸੇ ਜਕ ਨ ਕਦਮ ਯਕੋ ਸ਼ਹਿ ਫਿਰੰਗੋ ਸਿਆਮ ਸ਼ਾਹੇ ਅੰਗਰੇਜ਼ ਚੂ ਆਫਤਾਬ ਚੋ ਹਫਸੀ ਚੋ ਮਗਰੇ ਦਰਿਆ ਯਕੀਰਾ ਮੁਸਤੇ ਤੇ ਸਿਆਮਰਾ ਬਾ ਪਾਓ ਚੋ ਅਮਰਾ ਸੇ ਪਰ ਚੁਨਾਮੇ ਬ ਅਫਤਦ ਬਰਖਾਸਤ ਬਾ ਸੂਏ ਆਸਮਾਨ ਪਰਵਾਜ਼ ਸਾਜ ਦਿਗਰ ਕਸਨੇ ਆਮਦ ਤਮੰਨਾਏ ਜੰਗ ਕੇ ਪੇਸ਼ੇ ਨੇ ਆਮਦ ਦਿਲਾਵਰ ਨਿਹੰਗ ਸ਼ਵੇਸ਼ ਐ ਸ਼ਵਿਸਤਾ ਚ ਆਮਦ ਬਫੋਜ ਸਿਪਾਖਾਨਾ ਆਮਦ ਹਮੇ ਮੋਜ ਮੋਜ ਬਰੂਜ਼ੀ ਦਿਗਰ ਰੋਸ਼ਨੀਤ ਪਨਾਹ ਬ ਔਰੰਗਦਰ ਆਮਦ ਚੋ ਔਰੰਗ ਸ਼ਾਹ ਦੋ ਸੂਏ ਜਲਾ ਬਸਤੰਦ ਕਮਰ ਬ ਮੈਦਾਨ ਜੋਸਤੰ ਸੇ ਪਰ ਬਰਸੇ ਪਰ ਦੇ ਆਮਦ ਤੋਂ ਅਵਰੇ ਮਸਾਫ ਜਕੇ ਗੁਸਤ ਕਾਇਲ ਜਕੇ ਗਸ਼ਤ ਜਾਫ चकाचक बरखास्त ती रो तूफान खता खादा रामद हमहरंग रंग जे ती रोजे तोपोज ते गोतवर जे ने जावा नाच खवा नावक सिपर यकीन देवे आमद के जागो निशांचो गुरुदीद शेर हम चो पीले दमा कुनद तीरो 12 चो 12 आन में बरख चंदरा और चू बरक तेग ਬਾ ਜੋਸ਼ ਅੰਦਰ ਆਮ ਤਹਾਨੇ ਦੋ ਹਲ ਚ ਬਾਜ਼ਾਰ ਜਾਏ ਕਸ ਕੇ ਪਰ ਰਾਸ਼ਵਦ ਦੇਵੇ ਚੋ ਕਰਖੇ ਕੇ ਰਾਮ ਦਿਗਰ ਦੇਵ ਵਰਗਸ਼ਤ ਬਿਆਮਤ ਬਜਾਂਗੇ ਚੋ ਸ਼ੀਰੇ ਅਜ਼ੀਮੋ ਹਮ ਚੋ ਬਰਾ ਪਿਲੰਗ ਚੋ ਨਾਜ਼ਖੁ ਗੋਪਾਲ ਅੰਦਾਖਤ ਸਖਤ ਬਿਆਪਤਾਦ ਧਾਨੋ ਚੋ ਬੇਖ ਅਜ ਦਰਖਤ ਵਿਗਰ ਕਾਸ ਨੇ ਆਮਦਾ ਦੋ ਕੇ ਆਇਦ ਬਦੰਗੇ ਚੁਨੀ ਮਾਹਰੋ ਸਹੇ ਚੀਨ ਸਰਤਾਜ ਰੰਗੀ ਨਿਹਾਰ ਬਲਾਏ ਗਵਾਰਿਸ਼ ਤਹਨ ਬਰ ਕੁਸ਼ਾਦ ਸ਼ਬ ਆਮਦ ਯਕੇ ਫੌਜ ਰਾ ਕਰਦ ਵਧਾ ਬਾਦੀ ਆਗਾਜ਼ ਕਰਦ ਕੇ ਅਫਸੋਸ ਅਫਸੋਸ ਹੈ ਹਾਤ ਹਾਤ ਅਜੀ ਉਮਰ ਵਜੀ ਜ਼ਿੰਦਗੀ ਜ਼ੀ ਹਯਾਤ ਬਰੋਜ਼ੇ ਦੀਗਰ ਰੋਸ਼ਨੀਤ ਫੇ ਬਰ ਦਰਾਮਦ ਜੋ ਸਾਹੇ ਤੇ ਗਰ ਸਹਿ ਸੂਦੋ ਬਰਖਾਸ ਤੇ ਅੱਜ ਜੋਸ਼ ਜੰਗ ਰਵਾਸ਼ਦ ਬਹਾਰ ਗੋਛਾਤੀ ਰੋਤ ਫੰਗ ਰਵਾ ਸੁਦਾ ਕੈ ਬਰੇ ਕੀ ਨਾ ਕੋਸ਼ ਕੇ ਬਾਜ਼ੂਏ ਮਰਦਾਂ ਬਰਾ ਉਰਦ ਜੋਸ਼ ਜੋ ਲਸ਼ਕਰ ਤਮਾਮੀ ਦਰਾਵਤ ਬਕਾਮ ਯਕੇ ਮਾਨ ਓ ਰਾਸ ਸੁਵਟ ਸਿੰਘ ਨਾਮ ਬਿਗੋਇਦ ਕੇ ਏਸ਼ਾ ਰੋਸਤਮ ਜ਼ਮਾਨ ਬਿਕੁਨ ਜਾ ਬਗੀਰੀ ਕਮਾਨ ਵਾ ਗਜ਼ਬ ਆਮਦ ਚੋ ਸ਼ੇਰੇ ਜ਼ਿਆ ਨਾ ਪੁਛਦੇ ਦੇ ਹੰਬਾ ਨੂੰਏ ਹਮ ਚੁਨਾਬ ਬਾਪੋ ਸ਼ੇਦ ਖੋਤਾਨ ਜੋ ਸ਼ੇਦ ਜੰਗ ਬਾ ਕੋ ਸ਼ੇਦ ਚੋਂ ਸ਼ੇਰ ਮਰਤਾਨ ਹੰਗ ਬਜਾ ਕਮਾਂ ਕਰਦ ਬਾਰਿਸ਼ ਕਰੀ ਚਪੋਰਾ ਕਰਦ ਖਮ ਕਰਦ ਰਾਸਤ ਗਾਰੇ ਵੇ ਕਮਾਂ ਚਰਕ ਚੀਨੀ ਵਿਖਾਸਤ ਹਰਾ ਕਸ ਕੇ ਨੇਜ਼ਾਬ ਅਫਤਾਦ ਮੁਸਤੇਦਤਾ ਗਸ਼ਤ ਮੁਸਤੇ ਹਮੀ ਚਾਰ ਗਸ਼ਤ ਬਿਆਵੇਖਤ ਬਾਦੀ ਗਰੇ ਬਾਜ ਪਰ ਚ ਸੁਰਖ ਅਜਦ ਹਾ ਬਰ ਹਮੀ ਸ਼ੇਰ ਨਰ ਚੁਨਾਬਾਨ ਅਫਤਾਦ ਤੀਰੋ ਤਫੰਗ ਜ਼ਮੀ ਕੁਸ਼ਤ ਗਾਨ ਸੁਦਾ ਲਾਲਾ ਲਾ ਰੰਗ ਗੁਨਦ ਤੀਰ ਬਾਰਾਂ ਨਰੋ ਤਮਾਮ ਕਸੇਰਾ ਨਗਸ਼ਤੀਦ ਮਕਸੂਦ ਕਾਮ ਅਜੂ ਜੰਗ ਜੋ ਮਾਦਗੀ ਮਾਤਾ ਗਸ਼ਤ ਵਿਆਫਤਾਦ ਹਰ ਦੋਦਰ ਆ ਪਹਿਨ ਦਸਤ ਸ਼ਹਿਨ ਸ਼ਾਏ ਰੂਮੀ ਇਸ ਪਰ ਰੋਏ ਤੇਗਰ ਸ਼ਾਹ ਪੈਦਾ ਸੁਦਾ ਅਨੇਕ ਕੋਏ ਨਾ ਦਰਜੰਗ ਆਸੂ ਦਾ ਸ਼ੋਧ ਯੱਕ ਜਮਾਂ ਬਿਆਫਤਾਲ ਹਰਦੋ ਚੁਨੀ ਕੁਸ਼ਤਗਾਂ ਜਿਗਰ ਰੋਜ ਬਰਖਾਸਤ ਹਰਦੋ ਬਜੰਗ ਬਿਹਾ ਵੇਖਤ ਬਾ ਯੱਕ ਜਿਗਰ ਚੂ ਨਿਹੰਗ ਵਜਾਂ ਹਰਦੋ ਤਨ ਪੂਜਾ ਗਾਨੇਸ਼ ਸੁਦਾ ਕਦਾਂ ਸ਼ੀ ਨਗਾਹੀਨ ਅਰਵਾ ਸੁਦਾ ਬਰਖਸ਼ੰਦਰ ਆਮਦ ਚੋ ਮੁਸ਼ਕੀ ਨਿਹੰਗ ਵਸੇ ਮੰਗ ਸੀ ਬੋਧ ਬੰਗੋ ਪਿਲੰਗ ਕੇ ਅਵਲਖ ਸਿਆ ਅਵਲ ਕੋ ਬੋਜ ਬੋਰ ਬਰਖਸ਼ੰਦਰ ਆਮਦ ਚੋ ਤਾ ਮੋਰ जिरा पारा शुद खोद बा खुफता बंग जे बख्तर जे बरखश्तवां बा कुना तीर बा शवर कारजार जे बख्तर जे जि जिरा बरा रणशराल बरखसंद्र आमद चो शेरे ए निहंग दिमी गश्त शुद्ध हम चो पुष्टे पिलंग चुना ज्यादा शुद्ध आत शेर तीर वार के अकलश आज रफ्त होश आज چنا اب ایکت ہر تو ہو ما جائے جنگ کتھے گادمی اگشت تر کش کھ تنگ چنا جنگ کر دند سوا تاپ شام بے افتاد مرشد نہ خوردن تے جو خود ماندا شود ہر تو در جائے جنگ چھے روزیاں نو چ ਜਹਾਂ ਗਸ਼ਤ ਚੋਂ ਰੋਸ਼ ਨਸ਼ ਮਾਏ ਤਾ ਬੋ ਬਰਖਾਸਤ ਹਰ ਦੋ ਅਜ਼ੀ ਜਾਏ ਜੰਗ ਰਵਾ ਕਰਦ ਹਰ ਸੂਏ ਤੀਰੋਥ ਫੰਗ ਚੁਨਾ ਗਰਮ ਸੁਦ ਆਤਸ਼ੇ ਕਾਰ 10000 ਕੇ ਫੀਲੇ 20000 ਆਮਦ ਬਕਰ ਬਕਰ ਆਮਦਾ ਅਸਵ ਹਫਤ 7000 ਹਮਾ ਜਵਾਨ ਸ਼ਾ ਇਸ ਤੇ ਨਾਮਦਾਰ ਜੇ ਸਿੰਦੀ ਵਾਰ ਬੀਵਾ ਐ ਰਾਕਰ ਆਏ ਬਕਰ ਆਮਦਾ ਅਸ ਬਾਦ ਪਾਏ ਵਸੇ ਕੁਛ सरहंग ਸਰਹੰਗ ਸਾ ਇਸਤਾ ਸ਼ੇਰ ਬੇਵਕਤੇ ਤਰਦਦ ਵਕਾਰੇ ਦਲੇਰ ਵਾ ਗੁਰ ਰੀਦ ਨੇ ਆਮਤੋ ਅਵਰੇ ਸਿਆ ਨਵੇਂ ਖੂਨ ਮਾਹੀ ਲਕੋ ਤੇਗ ਮਾਹ ਬਜੰਗ ਅੰਦਰੂ ਗੋਗਹੇ ਗਾਜ਼ੀਆਂ ਜਿਮੀ ਤੰਗ ਸੁਧਿਆ ਸੁਮੇ ਤਾਜ਼ੀਆਂ ਸੁਮੇ ਬਾਦ ਪਾਇਆ ਬਰੋ ਦੇ ਚਹਾਰਮ ਤਪੀ ਦਾ ਆਫਤਾ ਬਜ਼ਿਲ ਵਹਦਰ ਆ ਵੇਖ ਤਜ਼ਰੀ ਤਨਾਬ ਵਿਗਰ ਕਮਰ ਯਮਾਨੀ ਕਮਰ ਦਾਸ ਬਰ ਰੋਸ ਪਰ ਚੋਹੋ ਸੰਦਰ ਆਮਦ ਪਜੋ ਚੋ ਕੋਸ਼ਿਸ਼ ਪਿਲੰਗ ਚੋ ਅਮਰੋਜ ਕੁਸਤੰਦ ਹਜ਼ਾਰ ਫੀਲ ਦੋ ਦਹ ਹਜ਼ਾਰ ਹਸਪੋਚ ਦਰਿਆ ਨੀਲ ਵਕਾਰ ਆਮਦ ਹੈ ਪਿਆਦਾ ਸੀ ਮਰਦ ਸ਼ੇਰਾਨ ਅਜ਼ਮੂਦਾਕਾਰ ਗੁਨਾਦ ਜ਼ਰ ਹੈ ਰਥ ਚਹਾਰੋ ਹਜ਼ਾਰ ਬਾ ਸ਼ੇਰਫ ਕਨੂ ਜੰਗ ਆ ਮੁਖਤਾਕਾਰ ਕਿ ਅਲਚਾਰ ਤੀਰ ਅਸਵ ਕੁਸਤ ਚਹਾਰ ਦਿਗਾਰ ਤੀਰ ਕੁਸਤ ਸਰੇ ਬਹਿਲਾਰ ਸਿਯਮ ਤੀਰ ਜਦ ਹਰਦੋ ਮਾਰੇ ਬਪੇ ਜਦ ਦੇ ਗੰਜ ਚਹਾਰ ਬਿਜਾ ਤੀਰ ਖਬਰਿ ਸ਼ਨਿਆਫਤ ਕੇ ਪਰਮਸ਼ ਬਬਰ ਧਰਮਸ਼ ਨਤਾਫਤ ਬਿਜਾ ਚੂ ਚੂਮ ਕੈਵਰੇ ਨਾਦਨੀ ਬਖੁਰਦੰਦ ਸ਼ਹਿਰਗ ਬਿਅਫਤ ਜ਼ਮੀਂ ਵਿਦਾਨਿਸ਼ਤ ਕੇ ਈਮਰਦ ਪੈ ਮੁਰਦਾਗਸਤ ਵੇ ਅਵਤਾਦ ਬੂਮ ਸ਼ੇਰ ਮਸਤ ਕੇ ਅਜਰਤ ਵੇ ਆਮਦ ਬਰਾ ਮਦ ਜ਼ਮੀ ਖਰਾਮੀ ਦਾ ਛਲ ਪੈ ਕਰੇ ਨਾਜ਼ਨੀ ਬਯਕ ਦਸਤ ਬਰਦਾਸਤ ਜੱਕ ਪਿਆ ਲਿਆ ਆਬ ਬਨਿ ਦੇਸ਼ੇ ਆਮਦ ਚੋ ਪਰਰਾ ਓਕਾਪ ਬਿਗੋਇਦ ਕੇ ਏਸ਼ਾ ਹੈ ਆਜ਼ਾਦ ਮਰਦ ਚਿਰਾ ਖੁਖਤਾ ਹਸਤੀ ਤੋ ਦਰ ਖੂਨ ਗਰਦ ਹੁਮਾ ਜਾਨ ਜਾਨੀ ਤੋ ਅਮ ਬਦੀ ਦਿਨ ਤੁਰਾਂ ਆਮਦਮ ਈ ਜ਼ਮਾਨ ਬਿਗੋਇਦ ਕੇ ਏ ਬਾਨੂ ਏ ਨੇਕ ਵਖਤ ਜੇ ਰਾਤ ਹੋਵੇ ਆਮਦਰੀ ਜਾਏ ਸਖਤ ਅਗਰ ਮੁਰਧਾ ਵਾਸੀ ਤਿਆਰੇ ਵਲਾਸ ਵਾਗਰ ਜ਼ਿੰਦਾ ਹਸਤੀ ਵਾਯਾ ਦਾਸ ਪਾਗ ਅਦਾਂ ਗੁਫਤਨੀਆ ਖੁਸ਼ ਆਮਦ ਸੁਖਨ ਬਿਗੋਇਦ ਕੇ ਏ ਨਾਦ ਸੀਮਤਨ ਹਰਾਂ ਕਸ ਕੇ ਖਾਹੀ ਬਿਗੋ ਮਨ ਦੇ ਏ ਸ਼ੇਰ ਦਿਲਮਨ ਗੁਲਾਮੇ ਤੋਂ ਹਮ ਖੁਦਾਵੰਦ ਬਾਸੀ ਤੋ ਏ ਕਾਰ ਸਖਤ ਕਿ ਮਾਰਾ ਬੇ ਅਖਬਾਰ ਕੁਨਨੇਕ ਬਖਤ ਬਿਜਦ ਪੁਸ਼ਤ ਪਾਓ ਖੁਸ਼ਾਦ ਜਪ ਚਸ਼ਮ ਹਮਾਰ ਵਸ਼ ਸ਼ਾਹਾਨ ਪੇਸ਼ੀਨ ਦਸ਼ਮ ਬਿਅਫਤਾਲ ਬਰਤ ਬਿ ਆਵਰਦ ਜਾ ਸ਼ਾਹ ਸ਼ਾਹੇ ਜ਼ਮਾਂ ਬਹੋਸ਼ੰਦਰ ਆਮ ਤੋ ਚਸ਼ਮਿ ਬਿਗੋਇਦ ਕਿ ਰਾਜ ਮਾਰਾ ਨਿਹਾਲ ਬਿਗੋਇਦ ਤੋ ਰਾਜਫਰ ਜੰਗ ਯਾਫਤਮ ਖੁਦਾ ਯਾਫਕਮ ਪਾਸ਼ੇ ਮਾਸ਼ਾ ਵਦ ਸੁਖਨ ਗੁਫਤਨ ਫਜ਼ੂਲ ਹਰਾਕਸ ਤੋਂ ਕੋਈ ਕੇ ਵਰਮਨ ਕਬੂਲ ਵਿਦੇਸ ਸਾ ਕੀ ਆਦਮ ਫੇਰੋ ਜਾ ਫਾਮ ਕੇ ਮਾਰਾ ਬਕਾਰ ਅਸਤ ਰੋਦੇ ਤਮਾਮ ਤੁਮਾਰਾ ਬਦੇਤਾ ਸ਼ੁਮਤਾ ਜਾ ਦਿਲ ਕੇ ਗੋਹਰ ਬਿਆਰੇ ਆਲੂ ਦਾ ਗਿਲ